शलोक ਲੋਕ ਮਹੱਲਾ नानक ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲਪਲਾਲੀਆਂ ਕੰਮ ਨ ਆਵੇ ਮਿੱਤ ਐ ਨਾਨਕ ਕਹਦਾ ਜੀਰੇ ਚਿੱਤ ਵਿੱਚ ਸ਼ਬਦ ਗੁਰੂ ਪ੍ਰਗਟ ਹੈ ਤਰੋਂ ਗਿਆਨ ਭੁੱਲਣ ਲੱਗਿਆ ਉਹਨਾਂ ਦਾ ਉਹਨਾਂ ਦਾ ਪਰਵਾਣ ਹੈ ਸੰਸਾਰ ਉਹਨਾਂ ਨਾਲ ਜਨਮਤਾ ਹੋ ਗਿਆ ਸਫਲਾ ਪ੍ਰਵਾਨ ਨਾਂ ਕਾ ਇਸੇ ਪ੍ਰਵਾਨ ਹੈ ਜਿਹਨਾਂ ਹਲੁਠਾ ਚਿੱਤ ਇਹਨਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਗਿਆ ਜਿਹਨਾਂ ਦੇ ਨਹੀਂ ਹੋਇਆ ਜਿਹਨਾਂ ਸਾਹ ਕੇ ਉਹ ਖਾਲੀ ਕੰਮ ਨਾ ਆਵੇ ਮਿੱਤ ਉਹ ਬਿੱਤਰ ਵੀ ਉਹਨਾਂ ਤਾਂ ਬਿੱਤਰਤਾ ਵੀ ਉਹ ਨਾਲ ਹੀ ਨਹੀਂ ਹੈ ਉਹਨਾਂ ਨਾਲ ਸਾਬ ਬਿੱਤਰਤਾ ਡੇਰਤਾ ਬਣਾ ਰੱਖੋ ਸੱਬਤਾ ਕੀ ਕਰਦੀਏ ਡੇਰਤਾ ਦੀ ਗੱਲ ਨਹੀਂ ਉਹਨਾਂ ਕੋਲ ਕੋਈ ਉਹ ਨਹੀਂ ਜਾਣ ਕੇ ਮਾਰੀ ਜਾਂਦਾ ਐ ਤਾ ਹੋ ਜਾਊਗਾ ਫਲਾਣਾ ਤੂੰ ਆ ਗੱਲ ਪਸ ਨੂੰ ਐ ਹੋ ਜਾਣਾ ਟੰਕਾ ਐ ਹੋ ਜਾਣਾ ਲੋਕਾਂ ਨੂੰ ਦੱਸੀ ਜਾਂਦੇ ਆਉਣ ਵਾਲਾ ਸਮਾਂ ਮੈਂ ਜਾਣਦਾ ਨੂੰ ਹੀ ਡਰਾਈ ਜਾਂਦਾ ਲੋਕਾਂ ਨੂੰ ਠੀਕ ਹੈ ਜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗੰ ਬਿਸਮਾਦ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਛਵਦ ਨਾਲ ਬੇਲ ਹੋ ਗਿਆ ਅਕਲ ਵਿੱਚ ਜਿਹੜਾ ਬੁੱਧੀ ਤੋਂ ਪਰੇ ਦਾ ਬਿਸਮਾਰ ਹੈ ਨਾ ਬੁੱਧੀ ਤੋਂ ਪਰੇ ਦਾ ਬਿਸਮਾਰ ਅਗਭੋਤ ਬਿਸਮਾਰ ਤੇ ਉਹਦਾ ਪਤਾ ਲੱਗਿਆ ਇਹਨਾਂ ਦਾ ਜਿੱਤੇ ਮੈਡੀ ਪੁਜੀ ਜਨਸੀ ਆ ਲੋਕਾਂ ਨਾਲ ਬ੍ਰਹਿਮਤਾ ਦਾ ਹੈ ਲੋਕਾਂ ਨੂੰ ਮਿਲਿਆ ਕੋਈ ਕਹਾਂ ਤੇ ਆ ਗਦ ਅਰਥ ਕਰਦ ਨਾ ਜੀ ਵੀਡੀਓ ਦੇਖ ਸਾਰੀ ਯਾਦ ਹੋ ਗਈ ਇਹਨੂੰ ਵਿਸਵਾਸ ਵਿਸਵਾਸ ਸੁਣੇ ਲੋਕਾਂ ਨੇ ਸੀ ਚਾਹੇ ਕਹਾਏ ਹੋਈ ਪਹਿਲਾਂ ਸ਼ੁਰੂ ਕਰਾਇਆ ਤੇ ਇਹ ਪਰਮਜੀਵ ਸਮਾਜ ਦੀ ਸੀ ਅਸਲ ਜੇ ਵਿਸਵਾਸ ਜਾ ਦੋਇਆ ਜਾ ਬਾਹਰ ਬਰਾਂ ਦੀ ਹੋਇਆ ਤੇ ਪਤਾ ਲੱਗ ਤੈ ਉਹ ਕਹੀ ਜਾਂਦੇ ਸਾਡਾ ਵਿਸਵਾਸ ਹੈ ਗੱਲਾਂ ਯਾਦੋਂ ਪੁੱਛਿਆ ਕੀ ਕਰਦੇ ਰਾ ਤੁਰੇ ਜਾਂਦੇ ਨੇ ਇਹ ਦੂੇ ਰਾ ਤੁਰੇ ਜਾਂਦੇ। ਰਸਤਾ ਟੋੜਾ ਤਾਂ ਰਸਤਾ ਸਾਡਾ ਉਹ ਨਾਟਾ ਜੋਗੀ ਹੁੰਦਾ। ਜਦ ਪਾਰ ਬ੍ਰਹਮ ਦ੍ਰਿਸ਼ਟੀ ਆਇਆ ਸ਼ਬਦ ਸੁਣਦਾ ਮੇਲ ਹੋਇਆ ਉਹ ਕਿਸੇ ਦਾ ਜਿਹੜਾ ਹੈ ਤਾਂ ਉਹਦਾ ਪਤਾ ਨਹੀਂ। ਪਾਰ ਬ੍ਰਹਮ ਪ੍ਰਭ ਤੋਂ ਕੀ ਭਾ ਬਣਦਾ? ਜਦੋਂ ਪ੍ਰਭ ਪਾਰ ਬ੍ਰਹਮ ਰੂਪ ਧਾਰ ਗਿਆ ਉਸ ਸਮੇਂ ਦੀ ਗੱਲ ਹੈ ਪਾਰ ਬ੍ਰਹਮ ਪ੍ਰਭ ਹੀ ਪਰ ਜੇ ਆਂ ਕਹਿੰਦੇ ਸਾਡਾ ਰਾਜਾ ਤਾਂ ਮਹਾਰਾਜ ਹੈ ਅੱਛਾ ਜੀ ਇੱਕ ਵਾਰ ਕਹੋ ਪ੍ਰਾਪਦਾ ਮੰਦ ਬੜਾ ਪਾਰ ਪ੍ਰਭੂ ਦਾ ਬ੍ਰਹਮ ਪ੍ਰਭੂ ਤੋਂ ਵੀ ਅਗੇ ਅੱਛੀ ਵਿਵਸਥਾ ਪਾਰ ਬ੍ਰਹਮ ਦਾ ਅਰਥ ਅਸਲ ਇੱਕ ਹੁੰਦਾ ਠੀਕ ਹੈ ਜੀ ਪ੍ਰਾਪਦਾ ਅਰਥ ਇੱਕ ਨਹੀਂ ਹੁੰਦਾ ਪ੍ਰਵਦਾ ਵੀ ਹੋ ਸਕਦਾ ਅੱਛਾ ਜੀ ਰਬ ਕਿੱਤ ਅੱਧਾ ਰਬ ਬ੍ਰਹਮ ਨਾਲ ਆਇਆ ਹੈ ਅੱਧਾ ਹੈ ਬਾਹਰ ਬ੍ਰਹਮ ਤੋਂ ਪਰਮੇਸ਼ਰ ਤੋਂ ਕੱਟ ਇੱਕ ਹੋਈ ਨਹੀਂ ਸਕਦਾ ਕੋਈ ਕਹੋਗੇ ਜਦ ਜੇ ਪੂਰਨ ਬ੍ਰਹਮਾ ਉਹ ਵੀ ਦੋ ਨੇ ਇੱਕ ਰੀ ਹੈ ਕਾਹ ਦੇਖਣੋ ਅੰਦਰੋਂ ਦੋ ਨੇ ਬਾਹਰੋਂ ਇੱਕ ਅੰਦਰੋਂ ਦੋ ਨੇ ਅੰਦਰੋਂ ਬਾਹਰੋਂ ਇੱਕ ਪਾਰ ਬ੍ਰਹਮ ਅੰਤਰ ਬਾਹਰ ਇੱਕ ਜਾਣੋ ਇੱਕੋ ਰਿਸ਼ਤ ਠੀਕ ਇਸ ਅਵਸਥਾ ਵਿੱਚ ਫਿਰ ਪੂਰਨ ਵਿਸਮਾਦ ਆਯਾ ਜੀ ਹਾਂ ਫਿਰ ਪੂਰਨ ਵਿਸਮਾਦ ਆਇਆ ਠੀਕ ਹੈ ਜੀ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਨਾਨਕ ਕਦੇ ਫਿਰ RAM ਨਾਮ ਧਨ ਪਠਾ ਦਿੱਤਾ ਅਸਲ ਜਬ ਪਾਰ ਬ੍ਰਹਮ ਤੋਂ ਪਹਿਲਾਂ RAM ਨਾਮ ਧਨ ਦੀ ਵਰਖਾ ਹੋਈ ਹੋਈ ਦੀ ਜਿਉਂਦੀ RAM ਨਾਮ ਧਰਗਤੇ ਉਦਾ ਹੂ ਨਾਲ ਰਾਮ ਰਾਮ ਰਾਮ ਰਾਮ ਆਈ ਜੀ ਦਾ ਬਹਰ ਲਈ ਤੌਂ ਤਾ ਅਖਰਫੀਆਂ ਦੀ ਬਾਰਿਸ਼ ਕੱਲਾਂ ਮੋਰਾ ਜਿਆਦਾ ਬੁੱਢੇ ਕੁੜੀ ਨੂੰ ਵਿਆਹ ਕਰਦੇ ਨੇ ਵਰਖਾ ਆਏ ਰਾਮ ਰਾਮ ਆਲੇ ਨੇ ਬਜਰੀ ਦੀ ਵਰਖਾ ਕਰਦੇ ਨੇ ਬਜਰੀ ਨਿਕਲ ਨਹੀਂ ਉਹ ਸਰਦੀ ਛੱਟ ਤਾਂ ਕੋਈ ਜਿਓ ਲੱਗਦੀ ਆ ਜੇ ਮੋਰ ਦੀ ਜਿਦਾਂ ਸਭ ਤੋਂ ਜਿਆਦਾ ਛੱਟ ਲੱਗਦੀ ਆ ਜੇ ਲੱਗੇ ਜਾਂ ਨਾ ਕੋਈ ਕੋਈ ਜਵਾਰਾ ਦੀ ਵਰਖਾ ਕਰਦਾ ਇਹ ਗਿਆਨੀ ਤਾਂ ਕਰਦਾ ਮੋਹਰਾਂ ਦੀ ਕਰਦਾ ਜਿਹੜੇ ਜਵਾਰਾ ਦੀ ਵਰਖਾ ਮੱਤ ਵਿਚ ਰਤਨ ਜਵਾਰ ਗੁਣ ਜਿਹਨਾਂ ਦੀ ਗੱਲ ਆਈ ਹੈ ਉਹ ਆਪਣੇ ਬਜਰੀ ਦੀਆਂ ਪਹਿਲੀਆਂ ਨੇ ਉਹ ਜਾਂਦੇ ਨੇ ਕਾਲੀ ਕੋਈ ਵੀ ਨਹੀਂ ਰੱਖਦਾ ਦੰਦੇ ਸਾਲ ਸਾਰੇ ਹੀ ਮੰਤਰ ਸਾਰੇ ਹੀ ਜਾਂਦੇ ਲੋਕਾਂ ਨੂੰ ਆਲਵਲਨੀਆਂ ਵੀ ਤਾਂ ਵਰਖਾ ਕਰਦੇ ਨੇ ਉਹ ਉਹ ਲੈ ਜਾਓ ਉਹ ਵੀ ਨੇ ਆਪਣੀ ਵਰਖਾ ਕਰਨੇ ਕਰਦੇ ਨੇ ਜੋ ਆਰਾਮੀ ਦਾ ਘਰ ਕੋਈ ਕੀਮਤ ਨਹੀਂ ਉਹਦੀ ਤਾਂ ਅੱਛਾ RAM ਨਾਮ ਧੰਨ ਕੀਤਾ ਕੀ ਭਵੰਦਾ ਜੀ ਕੀਤਾ ਜਦੋਂ ਪਹਿਲਾਂ ਕੀਤਾ ਨਮਾ ਆਇਆ ਹੈ ਤਾਂ ਨਾ ਹਲੁੰਦਾ ਗਿਆਨ ਹੈ ਜੇ ਤਾਂ ਨਮਾ ਹੁੰਦਾ ਜਾਗੋਂਗੇ રામેરા નીત્રમ પેલા હોતાઈ ની એ સરકાર કે આ જેડે અર્થો હુંડ દેખાયને પેલા હેગે ટીગ્યા प्रचार કહેગે سارے બળ જાયગે પારવરમે કર રહે ઓર કોણ કર રહે કે ભલાયા બોલતા હે જેڑا બોલતા ઉહી કર રહે ઓર કોણ કર રહે હે અયો ਅਲਫਲ ਲੀਆਂ ਨੇ ਸਭ ਮਾਰੀਆਂ ਸਾਰਿਆਂ ਨੇ ਕੇਰੇ ਬਗਾੜੇ ਪਾਇਏ ਕਹਿੰਦੇ ਗੋਲ ਪੱਕ ਬਣਾਤੀ ਕਹਿੰਦੇ 200 ਕਿਲੋ ਲੋਹਾ ਸਰਤੇ ਦਿੱਤੇ ਕਹਿੰਦੇ ਹੋ ਗਈ ਉਹਦੀ ਬੱਗ ਠੀਕ ਹੈ ਜੀ ਪੂਰੇ ਗੁਰ ਪ੍ਰਸਾਰ ਪੂਰੇ ਗੁਰ ਦੀ ਕਿਰਪਾ ਹੋਈ ਤਾਂ ਹੀ ਕੰਮ ਸਫਲ ਹੋਇਆ ਹਾਂ ਹੈ ਠੀਕ ਹੈ ਕੜਾ ਪ੍ਰਸਾਦ ਹੈ ਇਹ ਅਸਲੀ है ਇਹੀ ਹੈ ਉਹਦਾ ਉਹਦਾ ਨਾਮ ਤਾਂ ਹੁੰਦਾ ਹੀ ਕੜਾ ਪ੍ਰਸਾਦ ਹੈ ਇਹ ਗੁਰਪ੍ਰਸਾਦ ਹੈ ਕੜਾ ਪ੍ਰਸਾਦ ਹੈ ਠੀਕ ਹੈ ਲੱਭ ਮੋਹ ਵਗੁੱਤੇ ਕਰਤਬ ਕਰਨ ਭਲੇਰੀਆਂ ਮਦ ਮਾਇਆ ਸੁਤੇ ਜਿਹਦੇ ਅੰਦਰ ਤਰੋ ਹੈ ਤਰੋ ਉਹ ਖਸਮ ਨਾਲ ਨਹੀਂ ਚੱਲ ਸਕਦੀ ਸੱਚ ਦੀ ਇੱਕ ਦਾ ਪੈਸਾ ਚਾਹੁੰਦੇ ਨੇ ਲੈ ਉਹ ਕਹਿੰਦਾ ਜਹਿਰ ਹੈ ਇਹ ਚੱਕਣਾ ਦੇਖ ਬਣਾ ਭੱਜਿਆ ਚੱਲ ਨਹੀਂ ਸਕਦਾ ਸਾਰੀ ਆਦਮੀ ਡਰਾਕਾਰੀ ਆਦਮੀ ਤੋਂ ਚੱਲ ਸਕਦਾ ਚੱਲ ਖਸਮ ਨਾਲ ਲੱਭ ਬਹੁ ਵਗੁੱਤੇ ਕਿ ਲੋਭ ਦੇ ਅਰਬੋਹ ਦੇ ਵਿੱਚ ਜਦ ਦੁੱਬੇ ਨੇ ਉਹ ਸੰਸਾਰ ਨਹੀਂ ਛੱਡ ਸਕਤੇ ਉਹ ਸੰਸਾਰ ਤੋਂ ਬਾਹਰ ਨੂੰ ਲਈ ਜਾਂਦਾ ਉਹ ਸੰਸਾਰ ਨਾਲ ਚਿਪੜੀ ਬੈਠੀ ਹੈ ਉਹ ਕਿਵੇਂ ਚੱਲੂ ਤੇ ਉਹ ਵਾਲਾ ਮੋੜਾ ਕਿ ਕਿਹਾ ਸੇਭਾ ਮੈਂ ਉਹ ਕਹਿੰਦਾ ਦੁਆ ਕਰ ਛੱਡ ਪਰੇ ਮੈਂ ਜਾਣੇ ਦੀ ਚਾਹੁੰਦਾ ਆਖਰੀ ਛੱਡਣੀ ਨਾ ਕਿ ਜਾਣੇ ਦੀ ਇੱਛਾ ਦੀ ਜਾਂ ਵੀ ਨਹੀਂ ਜਾ ਸਕਦਾ ਕੋਈ ਨਹੀਂ ਜਾ ਸਕਦਾ ਹਾਂਜੀ ਧਰੋ ਕੇ ਬੋਲਣਾ ਹੈ ਜੀ ਪੈ ਜਾਣੇ ਰਾਰਾ ਨਹੀਂ ਰੱਖਿਆ ਇਹ ਨਾਲ ਜੀ ਜੀ ਧਰੋ ਨਾ ਚੱਲੀ ਖਸਮ ਨਾਲ ਲੱਭ ਮੋਹ ਵਗੁੱਤੇ ਕਰਨ ਭਲੇਰੀਆਂ ਮਦ ਸੁਤੇ ਕਰਤਵ ਕਰਨ ਭਲੇਰੀਆਂ ਹੂੰ ਨੇ ਬੁੱਧੀ ਆਰ ਠੀਕ ਹੈ। ਘਰ ਤਾਂ ਬੜੇ-ਬਲੇ ਕਰਦੇ ਨੇ। ਦੁਨੀਆਂ ਦੀ ਨਿਗਾ ਚੰਗੇ ਕੰਮ ਕਰਦੇ ਨੇ। ਠੀਕ ਹੈ। ਔਰਿਆਂ ਦੇ ਵਿਆਹ ਕਰਦੇ ਰਹਿ, ਬਈ ਵੀ ਸਾਫ ਕਰਦੇ ਨੇ। ਪੁਲ ਵੀ ਲਗਦੇ ਨੇ, ਸਕੂਲ ਵੀ ਖੋਲਦੇ ਨੇ। ਪਰ ਸਕੂਲਾਂ ਦੀ ਫੀਸ ਆਪਣੀ ਮਨਮਰਜ਼ੀ ਦੇ ਲਖਦੇ ਨੇ। ਵੱਲ ਮਾਇਆ ਸੋਤੇ ਲੰਦਰ ਵੀ ਚਲਾਉਂਦੇ ਨੇ। ਪਰ ਕਰਦੇ ਨੇ ਸਾਰੇ ਰੇਵਾ ਦਾ ਬੱਚੇ ਜ਼ਰੂਰ ਕਰਦੇ ਨੇ ਹਰ ਚੀਜ਼ 'ਚ। ਬੱਸਦੇ ਨੇ ਫਾਇਦੇ ਵਾਲਾ ਕੰਮ ਜਿਹੜਾ ਫਾਇਦਾ ਨਾ ਹੋਵੇ ਕੰਮ ਬਦਲ ਲੈਣੇ ਫਿਰ ਉਹ। ਬਾਹਰ ਭੇਜਣ ਦੀਆਂ ਅਰਦਾਸਾਂ ਵੀ ਕਰਦੇ ਆਂ ਜੀ। ਆਹ ਕਰਦੇ ਨੇ ਕਾਪਤਾ। ਪੈਸਾ ਜਾ ਜੋ ਮਰਜ਼ੀ ਕਰਾ ਲੈ ਹਮਤ। ਠੀਕ ਹੈ ਜੀ। ਮਦ ਮਾਇਆ ਸੁਤੇ ਮਾਇਆ ਦੀ ਸ਼ਰਾਬੀ ਫਿਰਦੇ ਆਂ ਵੀ ਸੁਤੇ ਆ। ਆ ਕੋਲੋਂ ਪੱਲ ਤੇ ਲੋਕ ਪੱਲ ਕੋਈ ਪਤਾ ਟਿਕਦਾ ਹੀ ਨਹੀਂ। ਪਹਿਲਾਂ ਤਾਂ 25 ਦੀ ਕੋਲੋਂ ਹੀ ਨੇ ਖੜਾਉਣੇ ਪੈਂਦੇ ਨੇ ਰੋਜ਼ ਦੇ। ਇਹ ਗੇ ਆ ਫਿਰ ਫਿਰ ਜੁਨੀ ਪਹਾਈ ਮਾਰਗ ਮੁੱਤੇ ਲੋਕਾਂ ਨੂੰ ਤਾਂ ਉਹ ਸੰਕਟ ਕੱਢਦੇ ਫਿਰਦੇ ਨੇ ਸੰਕਟ ਮੋਚਨ ਸ਼ਬਦ ਨੇ ਆਪਣੇ ਜੁਨੀ ਫਿਰ ਫਿਰ ਪਹਾਈ ਜਾਂਦੀ ਆ ਦੀ ਆਪ ਨੇ ਅੰਗੇ ਸੰਕਟ ਪਹੁੰਚਣ ਸੰਕਟ ਪਹੁੰਚਣ ਸੰਕਟ ਹੀ ਪਾਉਣ ਵਾਲੇ ਨੇ ਇਹ ਸੰਕਟ ਹੀ ਪਾਉਣ ਵਾਲੇ ਨੇ ਸੰਕਟ ਮੋਈ ਉਹ ਸੰਕਟ ਮੋਚਨ ਮਿਆਂ ਦੇ ਹੈ ਜਾਈ ਦੇ ਵਿੱਚ ਆ ਜਿਹੜਾ ਸੰਕਟ ਮਾੜਾ ਆਇਆ ਤੇਰਾ ਕੰਮ ਹળે ਆ ਕੋਈ ਇਹ ਹੋ ਜੂਗਾ ਠੀਕ ਇਹਨਾਂ ਦਾ ਇਹ ਦੇ ਵਿੱਚ ਤਾਂ ਤੇ ਕਿਆ ਕਾ ਕੀੜਾ ਦੇਖਿਆ ਮਾਏ ਸਮੋਦ ਤੇ ਫੇ ਕਿਆ ਕੀੜੇ ਨੇ ਇਹਨਾਂ ਦਾ ਵਿਖਿਆ ਦੇ ਵਿੱਚ ਲੱਗਿਆ ਹੋਇਆ ਇਹ ਤਾਂ ਕਹ ਲੈ ਕੀੜੇ ਨੇ ਸਾਰੇ ਪਲਾ ਨਹੀਂ ਕਰਦੇ ਪਲਾ ਤਾਂ ਕੋਈ ਕਿਸੇ ਦਾ ਵੀ ਨਹੀਂ ਕਰ ਸਕਦਾ ਡਰਾਮਾ ਕਰਦੇ ਨੇ ਡਰਾਮਾ ਲੋਕਾਂ ਦਾ ਨਾ ਕਰਨਾ। ਫਲਾਦਾ ਕੋਈ ਨਾ ਬੁਰਾ ਨਾ ਭਲਾ ਸਾਡੇ ਵਾਸਤੇ ਹੀ ਦੀ। ਤੇ ਅਸੀਂ ਸੇਤੀ ਜੁੱਤੇ। ਅੱਗੇ ਦੁੱਖਾਂ ਨਾਲ ਕੱਢਾ ਖੜਾ ਉਹਦਾਂ ਜੋੜ ਦੇਣੇ ਨੇ। ਇਹ ਜਿਹਨੇ ਉੱਗਣ ਕਰਦਾ ਦੇਖਿਆ ਹੈ ਹਟਾਇਆ ਹੈ ਦਰਕਰ। ਬੰਦੀ ਨਹੀਂ ਦਾ ਹੋਣਾ ਬਰੋਂ ਤੇਰੇ। ਤੂੰ ਹੀ ਇਹਦੇ ਨਾਲ ਹੁਣ ਸੁੱਝਕੇ। ਇਸ ਪੋਖੇ ਵਾਲੇ ਕੱਲੀ ਕਲੀ ਗੱਲ ਛੋੜਦੇ ਦੁੱਖ ਦੇ ਗੱਡੇ ਨੂੰ ਸੱਚੋ ਜਾਨ ਨੂੰ ਮਾਨਕ ਨਾਏ ਵਿਚਾਰੀਏ ਸਭ ਮੰਦੀ ਰੁੱਤ ਹੀ ਨਾਨਕਾ ਨਾ ਜਦ ਨਾ ਮਹੀਨਾ ਫਰਸਾਦ ਦਾ ਰੁੱਤ ਮੰਦੀ ਹੈ ਉਹ ਬਸੰਤ ਰੁੱਤ ਵੀ ਮੰਦੀ ਹੈ ਫੁੱਲ ਲੱਗਣਗੇ ਫਲ ਕਿੰਨੀ ਲੱਗਣਾ ਸਭ ਜਾਣ ਫੁੱਲ ਜਨੈ ਮਰਜੀ ਆਉਣ ਵਾਲੇ ਕਿੰਨੀ ਲੱਗਣਾ ਸਭ ਚਲ ਜਾਣਗੇ ਰੋਤ ਕੋਈ ਹੋਵੇ ਬੰਦੀ ਹੈ ੱਕਾ ਸਮਾਂ ਪੜਦਾ ਉਹਦੀ ਸੋਚ ਨਾਲ ਹੈ ਸੋਚ ਚੰਗੀ ਹੈ ਸਾਡਾ ਸਮਾਂ ਚੰਗਾ ਹੈ ਸਾਡੀ ਰੋਤ ਚੰਗੀ ਹੈ ਜਿਹੜੇ ਧਰੋ ਕਰਕੇ ਚੱਲੇ ਖਸਮ ਨਾਲ ਉਹਨਾਂ ਦਾ ਇਹ ਹਾਲ ਹੋਏਗਾ ਹਾਂਜੀ ਆ ਉਹਨਾਂ ਦਾ ਹੋਏ ਰਿਹਾ ਕੀ ਆਹ ਚੱਲਦਾ ਹੀ ਹੈ ਗੱਦਾ ਹੈ ਜੀ